लोग देण मान प्रभु छोड़ के लागे आल सोए नानक होऊंगा सी की बिन जाए देण हार प्रभु छोड़ देण हार प्रभु हां उनको लो छोड़ो जो लन्हाए ते देण आले तो रहने ਕਾਲੀ ਤੋਂ ਆਇਓ ਲਾਹ ਕੋ ਦੇਣ ਵਾਲਾ ਵੀ ਸੀ ਉਹ ਦੇਣ ਵਾਲਾ ਛੱਡਿਆ ਹੋਇਆ ਜੋ ਚੀਜ਼ ਲੈਣਾ ਹੈ ਤੇ ਦੇਣ ਵਾਲਾ ਸੀ ਜਿਹੜਾ ਉਹ ਛੱਡ ਗਿਆ ਇਹ ਲੈਣਾ ਹੈ ਕਿ ਨਾ ਕੋਈ ਚੋਰੀ ਨਾ ਵੀ ਹੈਗਾ ਦੇਣ ਵਾਲਾ ਵੀ ਹੁਣ ਵੀ ਹੈਗਾ ਉਹ ਵੀ ਗਿਆ ਉਹਦਾ ਸੁਣ ਦੱਸ ਇਸ ਤੋਂ ਕਰਾ ਲੂਗਾ ਆ ਜਬੀ ਜੋ ਜਿਸ ਸਮਾਂ ਹਮਨ ਕੀ ਹੁੰਦਾ ਬਹੁਤ ਮਾਰ ਆਇਆ ਮੈਂ ਕਹਿ ਚੁੱਕਾ ਕਿ ਜੋ ਬਿਸਭੁਲੀ ਹੋਈ ਗੱਲ ਹੈ ਉਹੀ ਆਦਮ ਸ਼ਮਾਂ ਦਾ ਆਦਮ ਕੋਲੇ ਆਇਆ ਕੀ ਹੈ ਭਰਾ ਨੂੰ ਆਇਓ ਲਾਹਣ ਇਹ ਗੱਲ ਭੁੱਲੀ ਹੁੰਦੀ ਹੈ ਇਹਨਾਂ ਦੀਆਂ ਕੱਦ ਤੇ ਪੇਪੇ ਜੀ ਅੱਜ ਪਾਈ ਲਿਆ ਆਪਾਂ ਕਿੱਦੇ ਭੇਜਿਆ ਫਲਾਣੇ ਤੋਂ ਜੀ ਲੈ ਲੈ ਸੀ ਤਾਰੇ ਕੋ ਉਹ ਕੋ ਲਿਆ ਦੇਸ਼ ਦੀ ਗੱਲ ਕਰਦੇ ਆ ਮੈਸੀ ਦੀ ਗੱਲ ਨਹੀਂ ਕਰਦਾ ਹਾਂ ਮੈਸੀ ਜੜ ਕੇ ਦੇਸ਼ ਦੀ ਗੱਲ ਕਰੀ ਜਾਂਦਾ ਕਿੱਦਾਂ ਵੀ ਕਰੇ ਦੇਣ ਹਾਰ ਕੋ ਲੈ ਸੋ ਬਣ ਜੋ ਥਾਉਦਾ ਤਾਂ ਸੌਦਾ ਵੀ ਭੁੱਲ ਗਿਆ ਦੇਣ ਹਾਰ ਨੂੰ ਜੇ ਦੇਣ ਯਾਦ ਹੋ ਸੌਦਾ ਵੀ ਯਾਦ ਹੋਣਾ ਸੌਦਾ ਯਾਦ ਨਾ ਦੋ ਤੇਰਾ ਜੀ ਹੋ ਲੋ ਤਾਂ ਕੋਈ ਜੰਪੂ ਸੋਇ ਦੇ ਜਨਹਾਰ ਨੂੰ ਭੁੱਲ ਗਿਆ ਜਿਆਦਾ ਮੁਸ਼ਕਲ ਹੈ ਦੇਨਾਰ ਕੋ ਚਲਿਆ ਜਾਂਦਾ ਲੋਦਾ ਉਹਦਾ ਦੁਕਾਨਦਾਰ ਨੂੰ ਪਤਾ ਕਿ ਲੈਣਾ ਹੈ ਮੈਂ ਕਿਹਾ ਭੋਜਾ ਗਿਆ ਇਧਰੋਂ ਸਾਰੇ ਯਾਦਾਂ ਦੇ ਜੇਫਾਗੀਆਂ ਨੂੰ ਦੇ ਦੇ ਠੀਕ ਹੈਂਦਾ ਉਹ ਜੋ ਕਹਦਾ ਮੈਂ ਮਾਰ ਕੋ ਲੈਣ ਆਇਆ ਸੀ ਭੁੱਲ ਗਿਆ ਗਰਮ ਨੂੰ ਪਾਖੀ ਲਾਣਾ ਨੂੰ ਕੋਮਾ ਕਰ ਗਿਆ ਅੱਲਾ ਇਹਦਾ ਉਹਨਾਂ ਦਾ ਇੱਕ ਅੱਲਾ ਜੇਨ ਹਾਰ ਦੇ ਕਿੱਗਲਾ ਜੇਨ ਹਾਰਾ ਹੈ ਉਹ ਇੱਕ ਉਹ ਇੱਕ ਤਾਵੇ ਫਰਕ ਪੈ ਜੂਗਾ ਤੇ ਜਦੋਂ ਉਹ ਸੇੜਾਇਕ ਗਿਆ ਇੱਕ ਹੋ ਚੁੱਕਿਆ ਉਹਦਾ ਜਿਹੜਾ ਸਮੂਹ ਹੈ ਗਰੋਹ ਹੈ ਇਕੱਠਾ ਸਮੁੰਦਰ ਆ ਉਹਦੇ ਨਾਲ ਕੋਈ ਕੋਰ ਜਿੱਤੇ ਤੱਕ ਸਰੇ ਕੋਈ ਕੋਰ ਕੋਈ ਫਰਕ ਨਹੀਂ ਜੋ ਦੇਣਾ ਚਾਹੁੰਦਾ ਹੈ ਕਮਲੋਈ ਦੇਣਾ ਚਾਹੁੰਦਾ ਸਾਰੇ ਵੀ ਉਹੀ ਦੇਣਾ ਚਾਹੁੰਦੇ ਜੋ ਇੱਕ ਦੇਣਾ ਚਾਹੁੰਦਾ ਸੀ ਉਹੀ ਸਾਰੇ ਦੇਣਾ ਚਾਹੁੰਦੇ ਜੋ ਸਾਰੇ ਦੇਣਾ ਚਾਹੁੰਦੇ ਉਹੀ ਇੱਕ ਦੇਣਾ ਚਾਹੁੰਦਾ ਸਭ ਫਰਕ ਕਿੱਥੇ ਪਿਆ ਜੇ ਤਾਇਆ ਉਹ ਆਪੇ ਸਵਾਲ ਵਿੱਚ ਪਾਇਆ ਜੱਟਾਂ ਜਿਆਦਾ ਚੀਜ਼ ਦੇਤੀ ਹਜ਼ਾਰ ਦੇ ਫੈਸਲੇ ਚੋਂ ਜ਼ਿਆਦਾ ਮਿਲਗੀ ਲੱਖ ਦੇ ਫੈਸਲੇ ਆਲੇ ਤੋਂ ਇਹ ਨਹੀਂ ਆਉਂਦੀ ਉਹ ਨਹੀਂ ਆਉਂਦੀ ਆਰ ਉਹ ਵੀ ਚਾਉਂਦੀ ਹੁੰਦੇ ਆ ਲੈਣਾ ਦੀ ਉਹ ਬਾਦ ਦੋਦੀ ਚਾਹੇ ਸਾਧਕ ਬਾਂਦੇ ਨਾ ਕਿਰਪਾ ਕਰੋ ਹਰੇ ਹੋ ਤਾਂ ਮੰਗ ਉਹ ਤਾਂ ਉਹ ਗੱਲ ਜੇ ਕੋਣਾ ਦੇ ਵੀ ਦੂਰੀ ਹੈ ਦੀ ਤੇ ਵਾਲਾ ਬਿਦੂਆ ਹੈ। ਸਮਾੜ ਵੀ ਦੂਰੀ ਹੈ ਤੇ ਵਾਲਾ ਬਿਦੂਆ ਹੈ। ਥੋੜੇ ਤੋਂ ਸਮਝ ਆਊਗਾ ਜੇ ਸ਼ਾਇਦ ਅੱਜ ਦੇ ਜਿਹੜੇ ਜੇ ਵਾਲਾ ਬਿਦੂਆ ਨਹੀਂ। ਤੋਂ ਇਹ ਭਾਇਆ ਉਹ ਕੋਣਾ ਨਹੀਂ ਉਹ ਵੀ ਜਦ ਵੀ ਕੋਈ ਕੋਣਾ ਭਾਇਆ ਵੀ ਨਹੀਂ ਸਭਨੇ ਦਾ ਅੰਤ ਅਸ ਅਸਦਰ ਠਾਕੁਰ ਘਾਪਰ ਕਰ ਸਭ ਦਰਿਆ ਕਰ ਕੀ ਹੈ ਹੁਕਮਾਤ ਜਿਨਾਂ ਆਪਣਾ ਕੇਵਲ ਪਦਰ ਕਰ ਕਰਤਾਲੂ ਹੁਕਮਾਤ ਕਰ ਉਹ ਕਰਤਾਲਾ ਰੋਕਮਾਤ ਦਸਤੀ ਹੁਮੰਦ ਕਰ ਹੱਥ ਆਇਆ ਹੁਕਮਾਤ ਹੈ ਹਟਾ ਲਿਆ ਮਾਛੇ ਭਿੰਨ ਕਰਿਆ ਉਸੇ ਜੋਈਗਾ ਹੱਥ ਮੇਰੇ ਉਹ ਬੁੱਧਰੋ ਦੇ ਹਸਤ ਦਾਰੇ ਕੋਈ ਜਲੂਬੀ ਆਪਾਂ ਨੇ ਢੋਟੇ ਆਖੇ ਜਾ ਆ ਕਬੂ ਉਹਦੀ ਪਾਵਰ ਕੀ ਹੈ ਉਹਦੀ ਪਾਵਰ ਕੋਲੇ ਹੱਥੇ ਕਿ ਹੈ ਜਦੋਂ ਪਾਛਾ ਦੇ ਵਿੱਚ ਗੱਲ ਹੈ ਕੋਈ ਪੋਜੀ ਹੈ ਲੈ ਕਹਨਾ ਜਿੱਤ ਅਗਲਾ ਤਾਂ ਚਾਂ ਹਾਲੇ ਸੁਪਨਾ ਜੈਦਾ ਸੀ ਉਹਦੀ ਅਗਲੇ ਹਰ ਦੀ ਕੋਈ ਹੈ ਉਡੀਕਾਂ ਫਰਾਂਜ਼ੇ ਨਹੀਂ ਕਰ ਸਕਦਾ ਰਹੇ ਪਹਿਲਾਂ ਤੋਂ ਸਾਜਣ ਤੋਂ ਇਹ ਆਈ ਦੀ ਆਗਾਸਿਤ ਤੇ ਕੀ ਬੀ ਗੁੱਸੇ ਕਿਸੀ ਫਾਦੀ ਵਾਦੀ ਨੂੰ ਸੱਦੇ ਕਿਸੇ ਸਤਾ ਸੱਦੇ ਦੀ ਵੀ ਕੋ ਜਿਆ ਹਾ ਦਾ ਹੁਕਮ ਕਰਾਉਂ ਤਾਲਾ ਕਰ ਹਜ਼ਰੀ ਫੇਰੀ ਹੈ ਛੱਟ ਕੀ ਆਦੋ ਹੁਕਮ ਦੋਏ ਕਾਰਜ ਹੋਰ ਕਰ ਮਰਦਾ ਗੱਲ ਪਾਚੀਏ ਕਾਰ ਦਾ ਲੋਹੋਂ ਖੂਸਾ ਦੋਏ ਹੋ ਗੁਣ ਤੋ ਗੱਲ ਸਮਝ ਕਾ ਕੋਨ ਆਇਆ ਹੋਤਾ ਦੇ ਕੋ ਕੋ ਗਿਓ ਕਰ ਰਹਾ ਹੋਏ ਆਹ ਖੂਸਾ ਫਿਰ ਵੀ ਮਨਸੇ ਕਾ ਜੇ ਬੋਲਦੇ ਹੋ ਕਮ ਬਣ ਪਾਉਂਦਾ ਹੋ ਕਮ ਜੇ ਆ ਹੋ ਗਿਆ ਇੱਕ ਰਹਿ ਗਿਆ ਤੇ ਤੋਂ ਸਰਿੰਡਰ ਆ ਦੋਏ ਹੋ ਕੇ ਇੱਕ ਜਹਾਜ ਹੋੜੇ ਨੇ ਕਿਛੇ ਦੋਏ ਚੰਗਲੇ ਤਕਰਾ ਜੋੜਿਆ ਨੇ ਜਿਹੜਾ ਜਿਹੜਾ ਸਾਡੀ ਜਿਹੜੀ ਕੱਢਦੇ ਦੀ ਚੱਲਦੀ ਦੋ ਸਾਜਣ ਘਾਰੇ ਦੀ ਚਾ ਗੜੀ ਦਾ ਕੌਤਕੀ ਬੁੱਲਣ ਇਹ ਤਾਂ ਇਹ ਗੋਲ ਕੰਡੋ ਬਾਦੀ ਆ ਵੀ ਉਹਦੇ ਸੇ ਬੁਲਗਾਦਨ ਫਿਰ 1 ਰੁਪਈਆ ਆ ਪਰ ਮੈਂ ਤਾਂ ਦਿੱਤਾ ਉਹਦਾ ਕਰਬੀਆਦਰ ਦੇ ਰੇ ਉਹਨਾਂ ਨੂੰ ਕਮਾ ਲਿਆ ਮੈਂ ਉਹ ਬੇਬਾਕ ਦਮੀ ਮੈਂ ਕਹਾ ਕੇ ਲਿਆ ਰੁਪਈਆ ਬੇ ਦੇ ਰੁਪਈਆ ਪਾ ਫੜਿਆ ਉਹ ਉਹਦਾ ਕਰੋੜਾ ਵੱਡੀ ਮੈਂ ਦੇ ਰਾਂਗੇ ਲਾ ਲੇ ਤੋ ਕੜੀ ਕੋਈ ਕਰਵਾ ਨਹੀਂ ਜਾਵੇ ਰੁਪਈਆ ਨੂੰ ਰੁਪਈਆ ਕਮਾਉਂਦਾ ਆ ਰ ਹੈ ਬਾਕੀ ਕਾਤਿਆ ਸਰ ਮੈਨੂੰ ਹੋ ਗਿਆ ਦੋ ਘੰਟੇ ਰੁਪਿਆ ਪਾਇਆ ਦੂਸਰੀ ਗੋਲਕੀ ਮੇਰਾ ਤਾਰਾ ਦਿਸਦਾ ਮੇਰੇ ਦਾ ਤੇਰਾ ਕਮਾਜ ਮੇਰੇ ਦਾਦਾ ਉਹ ਤਾਂਨੇ ਕਮਾ ਲਿਆ ਉਹ ਜਿਆਦਾ ਵੀ ਹੋਣੀ ਕਮਾਉਣੇ ਤੇ ਕਿਹਾ ਵਾ ਜਦੋਂ ਫਰੈਂਡਰ ਹੋਇਆ ਮਾਨੂੰ ਤੇ ਰਾਇ ਤਾਂ ਘਰੋਂ ਨਾ ਗਿਆ ਨਾ ਰੁਪਿਆ ਖਰਾ ਲੈ ਕੇ ਖੋਟਾ ਗਿਆ ਇਹ ਤਾਂ ਖੋਟਾ ਸੀ ਖੋਟਾ ਬਾਹਰ ਕਰਦਾ ਸੀ ਖੋਟ ਬਾਹਰ ਕਰਤੀ ਮਾਨਵ ਉਹਨਾਂ ਬਰ ਬਰ ਬਰ ਅਜਾਦ ਮਾਨਵਤਾ ਦੀ ਜਿਹੜੀ ਕਿ ਭਾਗਦਰ ਜੋਗ ਨੂੰ ਨਫ਼ਰਤ ਕਰੀ ਜੀ ਨਾਪਰਟਗਾਲੀਆਂ ਨੂੰ ਜਾਲਦੀ ਸੀ ਉਹ ਆਪਾਂ ਵੀ ਜਿਹਨੂੰ ਨਫ਼ਰਤ ਕਰਦੇ ਹਾਂ ਨਹੀਂ ਕਾ ਗੁੱਸੇ ਇਹ ਨਫ਼ਰਤ ਨਾ ਕਰੀਏ ਇਹ ਤਾਂ ਵੀ ਨਾ ਜੇ ਆਥਰਾ ਵੀ ਵਰਗੇ ਦੇਣ ਲੱਗੇ ਕੋਈ ਦੱਕੇ ਸਾਡੇ ਜਿਹੜਾ ਸਾਡੋ ਪਿਆ ਜੀ ਪੈਸਾਂ ਤੋਂ ਗੱਲ ਕਰਾ ਸਾਨੂੰ ਦੇਈ ਸੀ ਅੱਜ ਤੱਕ ਨਹੀਂ ਤੱਕ ਪਰ ਹੋਰ ਕੀ ਆ ਕਰਨਾ ਹੋਰ ਗੱਲ ਹੈ ਅਸੀਂ ਹਾਂ ਤਮੀ ਲ ਮੰਗ ਆ ਤੁਹਾਡੇ ਨਾਲ ਸਹੀ ਆ ਹੋਰ ਗੱਲ ਅਸੀਂ ਤਿਆਰ ਕਰਵਾਉਣਾ ਨਹੀਂ ਲੋਕ ਜਰਾ ਆਪਿਆ ਅਲੂ ਦੀ ਕਿਛੀ ਚੀਜ਼ ਕਰੀਦਾ ਤੁਸੀਂ ਆਪ ਕਿਆ ਗੁੰਦਾ ਨਹੀਂ ਅਸੀਂ ਜਿੰਦਗੀ ਕਰੂਗੇ ਫਰਕ ਦੇ ਦੂਸਰਾ ਵੀ ਕਾਹਦੇ ਉਹਦੇ ਪਿੱਛੇ ਕੋ ਲੋਜਿਕ ਵੀ ਚੈੱਕ ਹੱਸ ਜਿਹੜੇ ਕਿ ਆਪਕਿਏ ਕੋਈ ਫਾਇਦਾ ਦੂਜਿਆਂ ਨੂੰ ਪ੍ਰਭਾਵ ਆਵੇ ਕਿ ਇਹ ਚੀਜ਼ ਹੈ ਹੈ ਠੀਕ ਦੂਜੇ ਨਾਲ ਨਾਲ ਦੋਵੇਂ ਨਹੀਂ ਦੇ ਉਹ ਚ ਕਰਕੇ ਉਹ ਵੇਚ ਕਿ ਜੇ ਕਹੋ ਨਾ ਹਲਕਾ ਕਰਤ ਕਰਿਆ ਉਹਦਾ ਲੋਭ ਕਿਉਂ ਕਰਦਾ ਨਹੀਂ ਮੇਰੇ ਨਾਮ ਵਿੱਚ ਨਹੀਂ ਠੀਕ ਹੈ ਉਹਦਾ ਲੋਭ ਕਿਉਂ ਕਰਦੇ ਹੋ ਅਜੇ ਤੱਕ ਉਹਦਾ ਨਾਮ ਦੇ ਹੱਥਰ ਉਹ ਉਪਦੇਸ਼ ਨਹੀਂ ਕਰਦੇ ਲੋਭ ਤਾਂ ਕਰੋ ਜਿਹਨੇ ਕਹਿੰਦਾ ਹੱਥ ਲਾਏ ਲੱਗੀਆਂ ਮੈਂ ਕਹਿੰਦਾ ਵੀ ਨਾ ਇਹ ਤਾਂ ਤਾਂ ਹੈਗਾ ਨਾ ਕਮਾਈ ਤਾਂ ਸਟਰੀ ਵੀ ਨੇ ਫਿਰ ਉਹ ਸਮਝਿਆ ਕਿ ਸਰਦਾ ਤੋ ਬੀਓ ਪਰ ਇਹ ਕੀ ਜਿਹੜਾ ਨਾ ਪਿੰਡ ਦਾ ਵਿਕਿੰਦਾ ਬਚੇ ਰੇ ਕੋਲ ਆ ਕੇ ਖੜ ਕੇ ਲਾ ਦੀ ਦੋਂਗੋ ਕਿਉਂ ਕਹਿਉਂਦੀ ਸਰਦਾਰ ਜੀ ਲੋ ਹਾਂ ਜੀ ਸਿਰੋਗ ਸੇਨ ਹਾਰ ਪਰਮ ਸਵਾਰਥ ਵਿੱਚ ਲੱਗਿਆ ਹੋਰ ਇਹ ਬਣਾ ਲੈ ਸੌ ਸੌ ਜਿਹੜੇ ਸੀ ਤੁਸਮ ਵੇਦਰ ਦੇ ਲੋੜਾ ਜਿਹੜਾ ਆ ਮਾਇਆ ਸੀਗਾ ਜਿਹੜੀ ਲੋੜ ਪੂਰੀ ਕਰਨ ਆਇਆ ਸੀ ਤੇਰੀ ਅਸਲ ਕਾਰਜ ਜਿਹੜਾ ਰਹਿ ਗਿਆ ਸੀ ਉਹ ਪੂਰ ਲਿਆ ਉਹ ਦੁਕਾਨ ਦਾ ਕਰਗੜਾ ਬਣ ਕੇ ਆਇਆ ਤਾ ਸਤਗੁਰ ਦਾ ਜਾਨੀ ਯਾਰ ਕੋਈ ਟੀਨ ਲੈਣਾ ਚਾਹਦਾ ਜੇ ਕੋਈ ਦੁਕਾਨਦਾਰ ਕੋਲ ਜਿョਬੇ ਤਾ ਦੁਕਾਨਦਾਰ ਦਾ ਦਾਦਾ ਸੌਦਾ ਕੀ ਹੈ ਉਹ ਹੀ ਨਾ ਤਾ ਦੁਕਾਨਦਾਰ ਦਾ ਸਰੂਪਨ ਦੁਕਾਨਦਾਰ ਦਾ ਇਹ ਦੋ ਜੀ ਚੰਦਾ ਸੰਦੀ ਲੋੜ ਜੇ ਤਰਾਂ ਉੱਥੇ ਕੋਈ ਹੋਰ ਦੁਕਾਨ ਹੋਵੇ ਦੁਕਾਨਦਾਰ ਦਾ ਸਰੂਪ ਵੀ ਦੱਸਦਾ ਕਿ ਇਹ ਜਵਰ ਦਾ ਹੋ ਉਹ ਬੁਰ ਬੈਠਾ ਹੋਵੇ ਤੇ ਸ੍ਰੀ ਚੰਦ ਬਹਿ ਗਿਆ ਸੀ ਨਾਲੇ ਥੋੜਾ ਦੰਨ ਕਰੇ ਜਦੋਂ ਉਹਦੀਆਂ ਗੱਲਾਂ ਹੋ ਰਹੀਆਂ ਸੋ ਤਾਂ ਕੋਈ ਨਾ ਸੁਣਦੇ ਸਾਲੇ ਕੱਟੋ ਦਾ ਕੰਮ ਕਰਦੇ ਆਸ ਜੀ ਜਾਣ ਕੇ ਤੇ ਤੇ ਜੋ ਆਪ ਆ ਕੇ ਬੈਠੇ ਸੋ ਜੋ ਕੌਣ ਫਸਨੇ ਤੇ ਆਪਣੀ ਸੁਰੱਖਿਅਤ ਲੈ ਕੇ ਹੁੰਦੇ ਸੀ ਲੋਕੀ ਪਰ ਪੰਜੋ ਰੀਜੀ ਬਣੀ ਕੋਈ ਕੋਰਦਾ ਆਖੋ ਗੱਦਾਰੀ ਮੈਨੂੰ ਲੱਗਾ ਆੜ ਸਵਾਏ ਆਧਾ ਸੀ ਜਿੱਥੋਂ ਅਰੇ ਨਾਲ ਤੱਕ ਚੱਲ ਰਿਹਾ ਸੀ ਜੀ ਜਾਨ ਉਹ ਜੇ ਜਤਰਾ ਨਹੀਂ ਸੀ ਦਾ ਅਰਪਾਲਾ ਕਿਹਦੀ ਜਿਹੜੀ ਬੰਦ ਤੇ ਨਾ ਪੰ ਲੈ ਹਾਂ ਹਾਂ ਕੰਸਾ ਤੇ ਪੰ ਲੈ ਹਾਂ ਜਤਰਾ ਨਹੀਂ ਸੀ ਸਾਰੂ ਜਤਰਾ ਨਾਲ ਸਾਡੇ ਕੋਲ ਤੇ ਸਾਡੇ ਕੋਲ ਨਾ ਉਹ ਲਾਤਾ ਅੰਦਰਾਏ ਇਹ ਅੰਦਰੋਂ ਦਾ ਦੁਜੇ ਦਾ ਬਾਹਰ ਕਚੀ ਦਾ ਬਾਹਰ ਆ। ਜੋ ਦਤਾ ਉਹ ਵੀ ਦੀ ਰਾਜ ਦੁਜੇ ਰਾਜ ਦੀ ਛੱਦ ਲਾ ਗਿਆ। ਸੱਚਾ ਰਾਜ ਯਾਤੂ ਫੇਰਾ ਦੀ ਛੱਦ। ਜੋ ਪਬਲਿਕ ਅਲਗੀ ਹੋ ਗਿਆ। ਪਬਲਿਕ ਐਸੇ ਨਾਲ ਨਹੀਂ ਮਗਰ ਰਸ। ਆਂਸਾਇਲਾ। ਨਾਨਕ ਕਹੂਗਾ ਸਿੱਧੀ ਦਿਨ ਨਾਲੇ ਪਤ ਗਏ। ਕਹੂ ਨਾ ਸਿੱਧੀ ਕੋਰੇ ਨੂੰ ਕੋਈ ਨਹੀਂ ਆ ਰਹੀ ਜੀ ਸਾਰਾ ਕੁਭੀ ਨਹੀਂ ਆ ਆਨਸਵਾਇ ਵੀ ਦੇ ਦੇ ਟਾਇਲਟ ਹੱਥ ਇਹ ਚਾਹੁੰਦਾ ਤੇ ਐਸਾ ਮਾਇਆ ਦੀ ਜੇ ਤੁਸੀਂ ਪੂਰਾ ਪਜਾ ਤੇ ਵੀ ਛੱਡਣੇ ਦੀ ਚੇਲੇ ਜਾ ਜ਼ਿਆਦਾ ਬਣਾਉਣੇ ਤੇਰੇ ਭਈਏ ਵਧੀਆ ਬਣਾਉਣੇ ਮਾਇਆ ਵੀ ਰੱਖਿਆ ਹਰ ਤਾਂ ਜੀ ਦੋ ਰੋਜ਼ ਕਰਨਾ ਚਾਹੀਦਾ ਜੀ ਜੇ ਜਿਆਦਾ ਤਾਂ ਮੈਨੂੰ ਵੀ ਜਿਆਦਾ ਹੋਊ ਫਿਰ ਚੇੜਿਆਂ ਦੇ ਮਰਜ਼ੀ ਦਾ ਪ੍ਰਚਾਰ ਕਰਨਾ ਪਊ ਇਹ ਇਹ ਸਾਖ ਦਾ ਪ੍ਰਚਾਰ ਕਰਦੋ ਫਿਰ ਕੋਈ ਥੋੜੇ ਕੋਈ ਨਾਲ ਹੋਵੇ ਕੋਈ ਆਵੇ ਕੋਈ ਨਾਲ ਕਿੰਨੇ ਲੋਕ ਆਉਣਗੇ ਇਹ ਤਾਂ ਸਵਾਇ ਹੈ ਜੀ ਇਹ ਹੈ ਸਿਰਫ ਥਾਰ ਨਹੀਂ ਹੈ ਜੇ ਲੇਵਲ ਵਾਲੀ ਗੱਲ ਨਹੀਂ ਹੈ ਤੇ ਫਿਰ ਉਹ ਘਰ ਦੀ ਗੱਲ ਸਹੀ ਹੈ ਸੋਹੀ ਗੱਲ ਹੈ ਇਹ ਕਿਸੇ ਨਾਲ ਪਹੁੰਚੇ ਆਪਾਂ ਨੂੰ ਹੀ ਜਾਂਦੇ ਆਪਾਂ ਨੂੰ ਹੀ ਜਾਂਦੇ ਪਰ ਕਰਨਾ ਤਾਂ ਉਹਨੇ ਅਗਲੇ ਦਿਨ ਆਪਾਂ ਤੁਹਾਡੇ ਕੋਲ ਸਰੀਰ ਹਾਲੇ ਖਾਲੇ ਹਾਂਜੀ ਨਾਲ ਤੋਂ ਹੁਣ ਸਿੱਝੀ ਜਿਵੇਂ ਨਾਮ ਹੈ ਪਤ ਜਾਏ ਨਾਮ ਹੈ ਧਿਆਨ ਨਾਲ ਪਤ ਜਾ ਰਿਹਾ ਨਾਮ ਦਾ ਉਸ ਤੇ ਗਿਆਨ ਰੱਖਣਾ ਇਹ ਉਹ ਆਪਣਾ ਆਪਣਾ ਲੱਭਦਾ ਹੋਈ ਤੀਹ ਹੈ। ਆਪਰੇ ਆਪਰ ਨੂੰ ਉਲਪਖਾਜ ਨਾ ਕਰਿਆ। ਪੁੱਲ ਗਿਆ। ਜਿਹੜਾ ਨਾਮ ਅਸੀਂ ਨੇ ਸੱਚ ਦਾ ਗਿਆਨ ਮੰਨੇ ਆ। ਉਹ ਲੈ ਵੀਰ ਸਾਹ ਬਸਿਦਾ ਲੇ। ਜਿਹਨ ਨੂੰ ਸੋਝੀ ਨਹੀਂ। ਨਾਮ ਤੇ ਬਿਨਾ ਦੇ ਉਹਨਾਂ ਦੀ ਪਛਾਹ ਜਾਊਗੀ। ਉਹਨਾਂ ਦੀ ਇੱਜ਼ਤ ਨਹੀਂ ਬਚਣੀ। ਸੱਚ ਦਾ ਬਿਛੁਰ। ਪਰੇ ਆਦਮੀ ਨੂੰ ਇੱਜ਼ਤ ਦਾ ਦੂਜਾ ਬੇਦਬੋਰੀ ਕੜੀਆਂ ਹੱਡਾਂ ਕੋ ਕਰਦਾ ਹੈ ਕੋਦੂ ਸੀੜ ਨੂੰ ਮਾਰਿਆ ਜਾਵੇ ਕਿਉਂਕਿ ਜਦਾ ਬੇਚੀ ਹੈ ਲੈ ਕੇ ਕਬਰ ਜਾਣਾ ਹੈ ਲੋਕ ਸ੍ਰੇਸ਼ ਪਾਇਆ ਤੇ ਕੋਈ ਯਾਦਾਂ ਨੂੰ ਦੁਕਾਨ ਨੇ ਮਕਾਨ ਦਿੱਤਾ ਔੜ ਆੜ ਕੀ ਤਸੀਰੀ ਕੀਤਾ ਸੀ ਪਰ ਟਾਈਮ ਆਫ ਯੂਸ ਉਹਦੀ ਬਿਹਤਰੀਆਂ ਤੇ ਜਿਹੜੇ ਬਾਰੇ ਵਿੱਚ ਸਰਕਾਰ ਦੀ ਸੀ ਉਹਨਾਂ ਕਦਰ ਬਿਮਾਰੀਆਂ ਦਾ ਤਾਂ ਵੀ ਇੰਤਜ਼ਾਮ ਕੀਤਾ ਹੋਇਆ ਸੀ ਤੇ ਖੇਤਰ ਨੂੰ ਵੀ ਨੋਮੋ ਦੇ ਸਰਕਾਰ ਦੀ ਗੱਲ ਸੀ ਸਰਕਾਰ ਨੂੰ ਤਾਂ ਪਾਵਰ ਨਿਸ਼ਾਤ ਤੇ ਬਰਮਾਰੇ ਭਾਜਾ ਐਸਲ ਦੇ ਕੇ ਜਿਵੇਂ ਅਮੋਹ ਦੇ ਖਿਆਲ ਕੀਤੀ ਉਹ ਸਾਡੀ ਜ਼ਬਾਨੀ ਗਲਤੀ ਮੇਰੀ ਹੈ ਕਿ ਬਿਮਾਰੀ ਕਰਕੇ ਰਿਕਮ ਨਹੀਂ ਕਰਨੀ ਜਿਹੜਾ ਅੰਦਰੋਂ ਛੱਡਣਾ ਨਹੀਂ ਜਾਊਗਾ ਗੱਲ ਉੱਥੇ ਹੈ ਉੱਥੇ ਹੈ ਉਹ ਤਾਂ ਕੋਈ ਬਦਲ ਉਹ ਤਾਂ ਉਹਦਾ ਬਰੀਕਾ ਤੇ ਜੇ ਬਰੀਕਾ ਤੇ ਅੰਮ੍ਰਿਤ ਬਾਸ਼ਾ ਨਾਮ ਬਾਸ਼ਾ ਉਹ ਬਰੀਕਾ ਤੇ ਉਹਨਾਂ ਦੀ ਫਸਤਾਨੇ ਵਿੱਚ ਹੋ ਤਰੀਕਾ ਬੱਤੇ ਫਿਰ ਨੂਰ ਹੋਇਆ ਤੁਨ ਗਾਇਬ ਦੀ ਬਤਲ ਪੰਦਰੇ ਕਿਸੇ ਦੁਆ ਹੈ ਦੀ ਸੱਤ ਦੇ ਪਰਮੇਸ਼ੁਰ ਦੀ ਦੁਆ ਬਿਕਣਾ ਪਿਆ ਆ ਉਹਦੇ ਕਰਾਮਾਤ ਕੇ ਲੋਕਾਂ ਨਾਲ ਜੋੜੇ ਇੱਕ ਦੂਜੀ ਕਰਾਮਾਤ ਦਿਖਾਈ ਪੂਰੀ ਹੋਈ ਕਰਾਮਾਤ ਆਹ ਧੱਗਣ ਹਰੇਟਾ ਰਿਆ ਇਹ ਕਿਹੜਾ ਕਰਾਮਾਤ ਫਰੀਏ ਉਹਦੇ ਉਹ ਕਰਾਮਾਤ ਫਰੀਏ ਆ ਜਿਹੜੇ ਦੌਰ ਮਾਰੇ ਗੱਦੇ ਲਾ ਕੇ ਕਰਾਵਾਤੇ ਸੀ ਇਹ ਹੈ ਆਜਾਦਾ ਪਾਇਆ ਫੇਰੇ ਮਾਇਰਾ ਤੋਂ ਆ ਫੇਰਤਾ ਜੇ ਸਾਹਲੇ ਨੇ ਆਇਆ ਜਗਾ ਰਾਮ ਮਾਇਰਾ ਜਗਾ ਆ ਪਾਇਆ ਫੇਰੇ ਜੇਤੀ ਤੋਂ ਫੇਰੇ ਕਿਤੇ ਵੀ ਮੈਂ ਜਿਹੜਾ ਦੋ ਬੱਚੇ ਬੱਚੇ ਆਏ ਪਤਾ ਲੱਗਦਾ ਜਗਾ ਰਾਮ ਆਏ ਫੇਰੇ ਉਹ ਚਾਈਕਲ ਤੋਂ ਅਜਾ ਦੇਖੇ ਜਦੋਂ ਚੱਲ ਲੱਗਿਆ ਹਰ ਵੇਲੇ ਬਰਜ ਜਾਂਦਾ ਹੈ ਸੋੜ ਆ ਜਾਂਦਾ ਅੜਕ ਡੇ ਤੇ ਬਰਜ ਜਾਂਦਾ ਹੈ ਆ ਜਾਣਾ ਕੋਈ ਵੀ ਨਹੀਂ ਮੰਨਦਾ ਜਦੋਂ ਰੋਣ ਮੇਰੇ ਉਹ ਸਿੱਟਾ ਕਹਿ ਹਾ ਜਦੋਂ ਚੋਲੀ ਬੰਨਦਾ